ਕਵੈ ਕਬਨ ਵਡਾਈ ਜੋ ਰਾਜ ਦੇਤਾ ਕਵੈ ਨੇ ਮੇਰੇ ਸਾਹਿਬਾ ਰਾਜ ਦੇਤਾ ਕਵੈ ਨੇ ਵਡਾਈ ਜੋ ਰਾਜ ਦੇਤਾ ਕਵੈ ਵਡਾਈ ਜੋ ਰਾਜ ਦੇਦਾ ਕਵੈ ਕਵਨ ਵਡਾਈ ਜੋ ਰਾਜ ਦੇਤਾ ਕਵੈ ਜੋ ਰਾਜ ਦੇਤਾ ਕਬ ਕਬ ਨ ਬਡਾਈ ਜੋ ਰਾਜ ਦੇਤਾ ਕਬ ਨ ਰਾਜ ਦੇਤਾ ਕਬ ਨ ਰਾਜ ਦੇਦਾ ਤਾ ਕਵਲ ਕਵਨ ਵਧਾਈ ਜਾ ਰਾਜ ਦੇਦਾ ਤਾ ਕਵਲ ਜਾਂ ਰਾਜ ਦੇਤਾ ਕਵਨ ਵਿਦਾਈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਰਾਜ ਨਾ ਚਾਹੂੰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਮਨਪ੍ਰੀਤ ਮਨਪ੍ਰੀਤ ਚਰਨ ਕਮਲਾਰੇ ਜੋ ਰਾਜ ਦੇਤਾ ਕਵਨ ਜੋ ਰਾਜ ਕਵਨ ਜੋ ਰਾਜ ਦੇਤਾ ਮੇਰੇ ਸਾਹਿਬਾ ਜੋ ਰਾਜ ਦੇਦਾ ਕਵਨ ਮੇਰੇ ਸਾਹਿਬਾ ਜੋ ਰਾਜ ਦੇਦਾ ਕਵਨ ਬढ़ा ਪਾਜ ਮਾਨ ਮੇਰੇ ਪਦ ਨਿਰਬਾਨ ਤੂ ਹਰ ਪਾਜ ਮਾਨ ਮੇਰੇ ਪਦ तुहारे पाजे मन मेरे तुहारे पाजे मन में रे पद निरबान में तुहारे पाजे मन में रे अबरी काज तेरे किते नाकाम अबरी काज तेरे ਰਸਾਦ ਸੰਗਤ ਪਾਜੀ ਕੇਵਲ ਨਾਮ ਤੂਹਾਰੇ ਪਾਜ ਤੂਹਾਰੇ ਪਾਜ ਤੂਹਾਰੇ ਪਾਜ ਮਨ ਮੇਰੇ ਮਨ ਤੇਰੇ ਜੀ ਪਾਜ ਨਿਰਮਾਨੇ ਤੂਹਾਰੇ ਮਨ ਮੇਰੇ ਗੁਰੂ ਜੀ सेवा ते पगत को माइ तब ए मानिस देही भाई इस देही को सिमरै देव इस देही को सिमरै देव इस देही सेव तुहार ਹਰ ਪਾਜ ਮਨ पदनि बान तुहार पाजे मन मेरे रे ਰੇ ਮਨ लियो हरि नामा रे मन ओ ਤਨ ਸਜੀ ਪਾਵੇ ਪਦ ਨਿਰਬਨ ਤੁਹਾਰੇ ਪਾਜ ਮਨ ਮੇਰੇ ਤੁਹਾਰੇ ਪਾਜ ਮਨ ਮੇਰੇ ਤੁਹਾਰੇ ਪਾਜ ਮਨ ਮੇਰੇ ਪਦ ਨਿਰਬਨ ਤੁਹਾਰੇ ਪਾਜ ਮਨ ਮੇਰੇ ਪਦ ਨਿਰਬਨ ਹਰੀ ਪਾਜ ਮਨੇ ਦਾਈ ਜੋ ਰਾਜ ਦੇ ਦਾ ਕਵਨਿਆ ਬਣਾਈ ਜੋ ਰਾਜ ਦੇ ਦਾ ਕਵਨ ਜੋ ਜੋ ਪੀ ਖਮੰਗਾਵੇ ਤੋ ਕਿਆ ਕਟ ਗਈ ਤੁਹਾਰ ਪਜ ਮਨ ਮੇਰੇ ਪਦ ਨਿਰਬਾਈਨ ਤੁਹਾਰ ਹਰ ਮਨ ਮੇਰੇ ਪਦ ਨਿਰਬਾਈਨ ਬਾਹਰ ਨਾ ਹੋਏ ਤੇਰਾ ਆਬਨ ਜਾਨੀ ਸਬ ਤੇ ਉਪਾਈ ਸਬ ਤੇ ਉਪਾਈ ਪਰਮੁ ਪੁਲਾਈ ਜਿਸ ਤੂ ਦੇਵ ਹੈ ਤਿਸੈ 부ਝਾਈ ਸਤਗੁਰ ਮਿਲਾਇਤਾ ਸਤਗੁਰ ਮਿਲਾਇਤਾ ਸਤਗੁਰ ਮਿਲਾਇਤਾ ਸਹੰਜਾਈ ਸਤਗੁਰ ਮਿਲੇ milayta satgur milayta sahnsajai satgur ਸਤ ਗੁਰ ਕਿਨੇ ਨਾ ਪਾਇਓ ਬਿਨ ਸਤ ਗੁਰ ਕਿਨੇ ਨਾ ਪਾਇਆ ਤੂਹ ਸਤ ਗੁਰ ਮਿਲੈ ਤਾ ਸਤ ਗੁਰ ਮਿਲੈ ਤਾ ਸਤ ਗੁਰ ਜਾਈ ਸਤ ਗੁਰ ਸੋ ਸਤ ਗੁਰੂ ਤਨ ਤਨ ਸੋ ਸਤ ਗੁਰੂ ਤਨ ਤਨ ਜਿਨ ਪਰਮ ਘਰ ਤੋਂ ਓੜਿਆ ਸੋ ਸਤ ਗੁਰੂ ਆ ਹੋਵਾ ਜਿਨ ਹਰਿ ਸਿਓ ਜੋੜਿਆ ਸਤ ਗੁਰ ਮਿਲੈ ਤਾ ਸਹਸਾਜਾਈ ਸਤ ਗੁਰ ਮਿਲੈ ਤਾ ਸਤ ਗੁਰ ਸਤ ਗੁਰ ਮਿਲੇਤਾ ਸੈਂ ਸਜਾਈ ਸਤ ਗੁਰ ਮਿਲੇਤਾ ਬਿਨ ਸਬਦੈ ਅੰਦਰ ਹਨੇਰਾ ਬਿਨ ਸਬਦੈ ਅੰਤਰੀ ਬਿਨ ਸਬਦੈ ਅੰਤਰ ਅਨੇਰਾ ਬਿਨ ਸਬਦੈ ਅੰਤਰ ਅਨੇਰਾ ਬਿਨ ਸਬਦੈ ਅੰਤਰ ਅਨੇਰਾ ਨ ਬਸਤ ਲਹੇ ਨ ਝੂਕੇ ਫੇਰਾ ਸਤਿਗੁਰੂ ਹੱਥ ਤੁੰਗੀ ਹੋਰ ਤੂ ਦਰ ਖੁੱਲੇ ਨਹੀਂ ਗੁਰਪੂਰੇ ਪਾਗ ਮਿਲਾਵਨੇ ਆਏ ਜੀ ਸਤ ਗੁਰ ਮਿਲੈ ਤਾ ਸਹੰਸਾ ਜਾਈ ਸਤ ਗੁਰ ਮਿਲੈ ਤਾ ਜਾਈ ਸਤ ਗੁਰ ਮਿਲੈ ਸਤ ਗੁਰ ਮਿਲੇ ਮਿਲਾ ਜਾਈ ਸਤ ਗੁਰ ਮਿਲਾਇ ਤਾ ਸਤ ਗੁਰ ਮਿਲਾਇ ਤਾ ਸਹੰਸਾ ਜਾਈ ਕਿਸ ਹੋ ਪੂਜੋ ਤੂ ਜਾਨ ਹਦਰ ਨਾਈ ਸਤ ਗੁਰੂ ਪੂਜੋ ਸਦਾ ਮਨਾਵਾ ਸਤ ਗੁਰੂ ਮਨਾਵਾ ਐਸੀ ਸੇਵ ਦਰਧੈ ਸੁਖ ਪਾਵਾ ਸਤ ਗੁਰ ਮਿਲੈਤਾ ਸਤ ਗੁਰ ਮਿਲੈਤਾ ਸਤ ਗੁਰ ਮਿਲੈਤਾ ਜਾ ਗੁਰ ਮਿਲਦਾ ਸਤੂਰ ਮੇਰਾ ਬੇਮੋਹਤਾਜ ਸਤਗੁਰ ਮੇਰਾ ਸੱਚਾ ਸੰਸਾਰ ਦਾ ਸਤਗੁਰ ਮੇਰਾ ਸਭ ਸਦਾਤਾ ਸਤ ਸਤ ਮੇਰੇ ਕੀ ਵਿੜਾਈ ਪਰਗਟ ਪਈ ਹੈ ਸਭਨੀ ਤਾਏ ਸਤ ਗੁਰ ਮਿਲੇ ਮਿਲਦਾ ਸੰਸਾਰ ਲਈ ਸਤ ਗੁਰ ਸਤ ਗੁਰੇ ਮਿਲਾਇਤਾ ਸਤ ਗੁਰ ਮਿਟੋ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਰਿ ਉਪਦੇਸ ਉੰਗਿਆ ਨ ਅੰਜਨ ਦਿਆ ਜੇਨੀ ਨੇ ਤੇਰੀ ਜਗਤਨੀ ਹਾਲਿਆ ਸਤਿਗੁਰ ਸਤਿਗੁਰ ਸਤਿਗੁਰ ਮਿਲਾਇਤਾ ਸਹਿਨ ਸਜਾਈ ਸਤਿਗੁਰ ਮਿਲਾਇਤਾ ਸਹਿਨ ਸਜਾਈ ਕਿਸ ਹਉ ਕੁਝ ਦੂਜਾ ਮਧਰੇ ਮਾਇਆ ਕਿਸ ਹਉ ਕੁਝ ਦੂਜਾ ਮਧਰੇ ਆਵੇਗਾ ਕੈ ਪਾਥਰ ਕੀ ਜੈ ਪਾਓ ਇੱਕ ਕੈ ਪਾਥਰ ਕੀ ਜੈ ਪਾਓ ਤੁਝੇ ਪਾਥਰੀ ਤਰੀਏ ਮਾਓ ਜੀਉ ਧੇ ਹਰ ਕਿਸੇ ਦਾ ਵਾਦਾ ਤੇ ਕਵਨ ਬढ़ा